श्लोक मोहल्ला ਤੀਜਾ ਰਾਮ ਰਾਮ ਕਰਤਾ ਸਬ जग फिरे राम ना पाया ਅਗਮ अगम अगोचर अत्त वड्डा अ तुल ना तुलिया जाए गुण ਰਾਮ दर आप जिला की कर आदरम कर देसी गए सारे ही उनका दर आबदा मर चुका सी शरीर करके ओज नु याद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 ਇਹਦਾ ਆਰਾਮ ਕਰਤਾ ਸਭ ਜਗ ਫੇਰੇ ਸਾਰਾ ਜਗ ਫਿਰ ਆਰਾਮ ਕਰਦਾ ਪਰ ਆਮਦੀ ਪ੍ਰਾਪਤੀ ਕਿਸੇ ਲਈ ਹੋ ਰਹੀ ਇਹ ਕੀ ਗੱਲ ਉਹ ਵੇ ਤਾਂ ਜਿਹੜਾ ਨਾਮ ਉਹ ਪਹਿਲੇ ਵੀ ਉਹ ਨਾਮ ਪ੍ਰਾਪਤੀ ਕਰਤਾ ਹੋਵੇ ਹੂੰ ਨਾਮ ਤਾਂ ਤਾਂ ਦੇ ਸਕਦਾ ਹੋਵੇ ਉਹ ਅਕਾਲ ਪੁਰਖ ਦੇ ਸਵੇਰੇ ਹੀ ਅਕਾਲ ਦਰਹੰਦੀ ਗੱਲ ਚੱਲਦੀ। 라ਭ ਨੂੰ ਪਾਇਆ ਜਾਏ। ਜਿਹੜਾ 라ਭ ਘਟ, ਘਟ ਬੋਲਦਾ ਉਹ ਉਹ 라ਭ ਵੀ ਹੈ। ਰਾਮ ਕਰਕੇ। ਵਾਲੇ 라ਭ ਦੇ ਨਾਸ ਤੇ 라ਭ ਕਰਦੇ। ਜਿੱਤੇ ਬੋਲਦੀ ਵੀ। ਠੀਕ ਹੈ ਜੀ। ਤਨ ਜੋਤੀ ਕਰਨ ਅੱਗੇ ਕੁਝ ਹੋਰ ਹੂੰ ਹੂੰ ਠੀਕ ਹੈ ਜੀ RAM RAM ਕੀ ਹੋ ਰਹੀ ਹੈ ਹਾਂ ਜੀ RAM RAM ਨਾ ਅਤ ਵੱਡਾ ਅਤੁਲ ਨ ਤੁਲਿਆ ਜਾਏ ਰੱਬ ਗੋਚਰੇ ਅਤ ਵੱਡਾ ਅਗਭੂਤ ਸਭ ਅੱਛਾ ਜੀ ਜਿੱਦਾਂ ਅਗਬੁੱਦੀ ਉਹਨੂੰ ਚਿਤਵਰ ਬੇ ਜਿੱਦਾਂ ਭੈਜਨ ਕਰ ਲਵੇ ਜਿੰਦਾ ਜਿਹੜਾ ਜਹਾਜ ਆ ਬੁੱਧੀ ਉਹ ਜਹਾਜ ਦੀ ਹੁੰਦਾ ਹੋ ਉਹ ਹੈ ਨਹੀਂ ਸਕਦਾ ਹੈ ਬੁੱਧੀ ਨੂੰ ਭੈਜਨ ਕਰੇ ਨਹੀਂ ਸਕਦੀ ਅੱਛਾ ਹੱਤ ਵੱਡਾ ਹੈ ਕਿਉਂਕਿ ਇਹ ਦੋ ਵੱਡਾ ਇਹ ਤਾਂ ਦੱਸਿਆ ਨਹੀਂ ਜਾ ਸਕਦਾ ਫਿਰ ਕਿਵੇਂ ਭੈਜਨ ਹੋ ਜਾਊ ਮਤਨ ਦਾ ਤੋੜਿਆ ਜਾਏ ਦਾ ਆਦਰ ਵਧਨ ਕੀਤਾ ਜਾ ਸਕਦਾ ਹੈ ਪਰ ਜਾ ਸਕਦੀ ਕਥਾ ਕੋਈ ਨਹੀਂ ਜਾ ਸਕਦੀ ਕਥਾ ਇਹ ਜੇ ਕੋ ਬੀ ਬੁੱਧੀ ਤੋਂ ਪਰੇ ਹੈ ਕੀਮਤ ਕਿਨੇ ਨਾ ਪਾਈਆ ਕਿਤੇ ਨਾ ਲਾਇਆ ਜਾਏ ਗੁਰਕੇ ਸ਼ਬਦ ਭੇਦਿਆ ਇਨ ਬਿਧੀ ਬਸਿਆ ਮਨ ਆਈ ਦਾ ਪੰਨ ਜੇਬ ਸਬੂਤਰ ਦੇ ਵਿੱਚ ਤਾਂ ਜਾ ਕੇ ਆਪਾਂ ਸੋ ਆਪਣਾ ਪਾ ਲਈਰ ਕਰਦੇ ਆਪਾਂ ਦਾ ਪਲ ਕੋ ਦੇਗੇ ਸਬੂਤਰ ਜਲੀਰ ਹੋ ਜਾਂਦਾ ਪਰ ਵਿੱਚ ਵੱਢ ਜਾਂਦਾ ਸਬੂਤਰ ਦਾ ਰੂਪੇ ਹੋ ਜਾਂਦਾ ਆਪਾਂ ਨੇ ਸੋ ਆਪਾਂ ਨੇ ਆਪਣੀ ਜੇਬ ਵਿੱਚ ਪਾ ਲੰਡ ਕਿ ਤਾ ਇਹਨੂੰ ਟੋਲ ਨਹੀਂ ਸਕਦਾ ਆਪਾਂ ਨੇ ਸਭ ਕਹਿੰਦਾ ਕਿ ਇਹਦਾ ਪਾਣੀ ਦਾ ਬਵੀਏ ਰੂ ਦਾ ਪਾਣੀ ਦੀ ਬੂਝ ਗਈ ਹੈ ਫੱਟੀ ਗਈ ਵਈਆ ਪਾਣੀ ਦਾ ਜੁੜ ਗਿਆ ਨਾਲ ਦਾ ਪਾਣੀ ਤਹੋਗੇ ਹਾਂਜੀ ਕੀਮਤ ਜਾਏ ਨਾਉ ਦਿਕੇ ਸਰ ਕੀਤ ਪਾਈ ਅਭੀ ਇਹਨੇ ਨਾ ਮਿਲ ਜਾਂਦਾ ਹੈ ਗਮੀਰ ਦੇ ਤੇ ਰੋਬ ਲਿਓ ਹੈ ਬੋਲ ਮਿਲ ਜਾਂਦਾ ਆਪਕੇ ਬੋਲਣੂ ਪਰ ਗੋਲ ਬੱਟੇ ਮਿਲਦਾ ਵਾਣ ਵੇਚਣਾ ਬੰਦਾ ਮਨ ਵੇਚ ਕੇ ਕੇ ਪਾਸ ਜਦ ਬੰਨਵੇ ਤਾਂ ਫਿਰ ਉਹਦਾ ਹੀ ਹੋ ਗਿਆ ਆਪ ਸਾਰਾ ਫਿਰ ਆਪ ਉਹ ਤੇ ਜੀ ਲਿਆ ਲੈ ਲੀ ਗਿਦੇ ਸੀ ਲੈਣ ਵਾਲਾ ਤਾਂ ਵੇਚਦਾ ਉਹ ਬੁੱਧੀ ਨੇ ਬੋਲ ਰਿਹਾ ਬੰਦੇ ਆਪਣਾ ਬੰਦੇ ਬੁੱਧੀ ਤੇ ਹੋ ਗਈ ਉਹ ਬੁੱਧੀ ਦਾ ਹੋ ਠੀਕ ਹੈ ਬੰਨ ਜੀ ਨੇ अदा करके मिलता है, ਹੈ ਜੀ ਹਾਂ ਜੀ ਹਾਂ ਜੀ ਇੰਦੀ ਕੀ ਉਹ ਤਰ੍ਹਾਂ ਗੱਲ ਪੈਂਦੀ ਆ ਠੀਕ ਹੈ ਉਹਦੀ ਜਿਹੜਾ ਪਹਿਲੇ ਆਪਣਾ ਪਾਣ ਦਾ ਖਤਮ ਹੀ ਕਰਨਾ ਪੈਂਦਾ ਇਹ ਤਾਂ ਫਿਰ ਚੇਤਨਤਾ ਦੀ ਗੱਲ ਹੈ ਜੀ ਕਿਸੇ ਵੀ ਜੜ ਵਸਤੂ ਨਾਲ ਨਿੱਕੀ ਗੁੱਤ ਪਾਈ ਜਾ ਸਕਦੀਆਂ ਜੀ ਗੁਰ ਕੇ ਸ਼ਬਦੀ ਭੇਜਿਆ ਗੁਰੂ ਵਿਦੇਸ਼ ਦੇ ਲਾਲ ਬੋਲ ਭੇਜਿਆ ਗਿਆ ਬਿਲਿਆ ਗਿਆ ਬਾੜਾ ਦੇ ਵਿੱਚ ਜੇ ਵੀ ਵਰਲਡ ਕੱਪ ਆਈਦਾ ਭੇਜਦੇ ਤੇ ਮੈਨੂੰ ਵਰਲਡ ਕੱਪ ਵਿੱਚ ਕੱਢਣੀ ਜਿਹੜਾ ਬੰਦਾ ਬੰਦਾ ਉਹ ਭੇਦਿਆ ਅਸਲ ਚ ਬੰਦਾ ਪਰਮ ਦੂਰ ਕੀਤਾ ਪਰਮ ਭੇਦਤਾ ਉਹਦਾ ਪਰਮ ਦੇ ਵਿੱਚ ਤਾਰੇ ਪਾਸ ਤੇ ਬੱਦਿਓਸ ਰਾਖ ਦੇ ਬਿਚੀ ਗੀਦਾ ਉਹ ਚੰਗਾ ਪਲ ਦੇਸ ਹੱਥ ਸ਼ਬਦ ਭੇਦਿਆ ਇਨ ਬਿਧੀ ਵਸਿਆ ਮਨ ਆਏ ਇਹ ਬਿਧੀ ਵਸਿਆ ਬਗਦਾ ਹੈ ਇਸ ਬਿਧੀ ਦੇ ਦੁਆਰਾ ਬਹੁਤ ਕੀਆ ਮੈਂ ਤੇ ਦੇ ਬਲ ਨਹੀਂ ਸਕਦਾ ਉਹਨੂੰ ਕੋਈ ਦੇਖਿਆ ਵੀ ਹੈ ਬਾਹਰ ਉਹ ਉਰਪ ਉਦਖਣ ਵੀ ਕਰਾਇਆ ਉਸ ਬੁਝਾਇ ਸਮਝ ਵੀ ਆਈ ਹੈ ਅੰਗਲੇ ਸੂਤ ਤੁਸੀਂ ਉਹ ਭੇਡਿਆ ਗਿਆ ਸੂਤ ਖੰਡੋਂ ਦਾ ਖੜਿਆ ਗਿਆ ਖਾਦਾ ਸੂਤ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਕਹਿੰਦਾ ਆਪ ਅਭਯੋ ਹੈ ਆਪ ਕੀ ਅਬਲੇ ਦੀ ਧਾਰ ਹੈ ਹੂੰ ਹੂੰ ਅਵਰ ਅਗਰਤ ਰੂਪ ਹੈ ਪਾਵਦਾ ਅਗਰਤ ਰੂਪ ਹੈ ਅਵਰ ਹੈ ਹਾਂਜੀ ਸਾਪ ਅਗਰਤ ਕੀ ਅਵਰ ਹੈ ਜੀ ਬਾਤ ਹੋ ਕੇ ਤੇ ਬਰਦੀ ਬਣ ਗਈ ਹੂੰ ਹੈ ਬਿਓ ਆਤਮ ਵੀ ਅੱਛਾ ਜੀ ਤੇ ਕਦ ਆਇਆ ਜੁੜ ਕੇ ਸਭ ਹੋ ਜਾਂਦਾ ਹੈ ਠੀਕ ਹੈ ਜੀ ਗੁਰ ਦਾ ਇੱਕ ਇੱਕ ਕੰਸ ਹੋਇਆ ਵੇ ਗੁਰ ਕਿਰਪਾ ਤੇ ਰਹਾ ਸਮਾਏ ਯਾਦ ਇਹਦੀ ਇੱਛਾ ਜਾਦੇ ਨੂੰ ਲੋਭ ਦੀ ਭੁੱਖ ਲੱਗਦੀ ਹੈ ਪੇਟ ਤਾਂ ਉਹੀ ਹੈ ਸੱਚੇ ਲੋਭ ਜੇ ਭੁੱਖ ਲੱਗਿਆ ਵੇ ਹੋ ਗਿਆ ਤਾਂ ਸਿਰਫ ਭੁੱਖ ਦਾ ਹੀ ਹੈ ਭੁੱਖ ਇੱਛਾ ਕੀ ਕਿਹੜੀ ਜਿੰਨਾ ਜਨ ਮਾਇਆ ਦੀ ਕਹਿ ਉਹ ਨਾ ਚੜੇ ਗਲੇ ਹੋਏ ਹੁੰਦੇ ਨੇ ਜਿਆ ਨਾਮ ਦੀ ਭੁੱਖ ਜਗਦੀ ਹੈ ਗੁਰ ਫਿਰ ਫੁਰਜੀਤ ਹੋ ਜਾਂਦੇ ਉਹ ਤੇ ਰਹਿਆ ਸੁਮਾਇ ਗੁਰ ਕਿਰਪਾ ਤੇ ਰਹਿਆ ਸੁਮਾਇ ਸਤਗੁਰ ਕਿਰਪਾ ਕਰਕੇ ਸੁਮਾਇ ਰਹਿਦਾ ਉਹ ਕਿਰਪਾਲੂ ਰਹਿਦਾ ਜਿਦਾ ਜਰ ਇਹ ਉਹਦਾ ਅਨਸਾਰੀ ਰਹਦਾ ਇਰੂ ਗੁਰ ਕਾ ਵਜਨ ਚੰਗਾ ਲੱਗਦਾ ਹੈ ਸਾਧ ਗੁਰੂ ਹੈ ਚੰਗਾ ਲੱਗਦਾ ਬੱਚਿਆ ਗਿਆ ਬੱਚਾ ਬੋਬਾਪ ਦਾ ਆ ਗਿਆ ਕਾਲੀ ਹੁਕਮ ਹੁੰਦਾ ਹੈ ਖੁਸ਼ੀ ਦਰ ਬੱਚਾ ਬੋਬਾਪ ਨੂੰ ਚੰਗਾ ਲੱਗਦਾ ਮਾ ਬੱਚੇ ਨੂੰ ਚੰਗਾ ਲੱਗਦਾ ਨੇ ਖੁਸ਼ੀ ਦਾ ਤਾਈ ਨ ਦਰ ਹੋ ਜੇ ਚੰਗਾ ਲੱਗਦਾ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਆਪੇ ਮਿਲਿਆ ਹੋਇਆ ਇਹ ਜਦੋਂ ਉਹ ਪ੍ਰੇਮ ਕਰਦੇ ਜਿਹੜੀ ਗੱਲ ਕਹਿੰਦਾ ਉਹ 7 ਵਜੇ ਤੇ ਕਹਿੰਦਾ ਹੈ ਅਦਰੋਂ ਬੋਲਦਾ ਹੈ ਉਹਦੀ ਗੱਲ ਨੂੰ ਜਿੱਦੀ ਗੱਲ ਬੋਲਦਾ ਉਹਨੂੰ ਖੁਸ਼ੀ ਹੋਈ ਚੰਗਾ ਲੱਗਦਾ ਮਿਲਿਆ ਹੋਇਆ ਹੀ ਪ੍ਰੇਮ ਕਿਉ ਤੇ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਪੇ ਮਿਲਿਆ ਮਿਲ ਰਿਹਾ ਜਿਹੜਾ ਆਪੇ ਬਣਿਆ ਹੋਇਆ ਹੈ ਜਿਹਨੇ ਤੱਕੇ ਨੀ ਹੀ ਬੁਲਾਇਆ ਉਹ ਹੀ ਮਿਲਿਆ ਹੋਇਆ ਆਪਣੀ ਇੱਛਾ ਦੇ ਵੇਲੇ ਆਪਣੀ ਰੂਚੀ ਦੇ ਵੇਲੇ ਆਪੇ ਮਿਲਿਆ ਜਿਹੜਾ ਮਿਲਿਆ ਉਹ ਕਹਿੰਦੇ ਛੱਡੂਗਾ ਤੂੰ ਤਬੋਂ ਸਾਂ ਬੱਚਾ ਗਿਆ ਭੱਜ ਕੇ ਗਾਣੇ ਆਈਏ ਤੁਗ ਲੱਗੇ ਆਪੇ ਵੀ ਰਹੋ ਉਹ ਕਹਿੰਦੇ ਛੱਡੂਗਾ ਤੂੰ ਮਨਲਾ ਤੀਜਾ ਇਹ ਮਨ ਇਹ ਧਨ ਨਾਮ ਹੈ ਜਿਤੇ ਸਦਾ ਸਦਾ ਸੁਖ ਹੋਏ ਟੋਟਾ ਮੂਲ ਨਾ ਆਵੇ ਲਾਹ ਸਦਹੀ ਹੋਏ ਇਹ ਬੰਦ ਇਹ ਤਾਲੁ ਇਹ ਆ ਉਹ ਦੇ ਵਿੱਚ ਫਰਕ ਹੈ ਜਿਤੇ ਇਹ ਹੈ ਉਥੇ ਉਹ ਹੈ ਇਹ ਸੱਚ ਕਾਲਕ ਚਕਿ ਕਲਾ ਬੋਲਦਾ ਜਨਾ ਮਾਇਆ ਦਾ ਕੱਟਾ ਫਿਰ ਉਹਨੂੰ ਦੂਰ ਲੱਗਿਆ ਤੁ ਇੱਕ ਦਾ ਅੰਦਰ ਆ ਪਖੜੇ ਦਰਵਾਜੇ ਦੇ ਵਾਲੇ ਦਾ ਭਾਉ ਕਹੋ ਜੀ ਇਹ ਸਤਖੰਡ ਤੇ ਬਾਹਰ ਹੈ ਜਿਹੜਾ ਤੁਨ ਮਾਇਆ ਦਾ ਇਹ ਉਹ ਹੋ ਗਿਆ ਇਹ ਗੱਲ ਚੱਲ ਰਹੀ ਹੈ ਦਰਪੋਤ ਦੀ ਅਰ ਇਹ ਬਦਲ ਜਿਹਦੀ ਗੱਲ ਚੱਲ ਰਹੀ ਹੈ ਉਹ ਗੁਰੂਕੀ ਬਦਲ ਇਹ ਬਦਲਿਆ ਹੋਇਆ ਹੁਣ ਸੰਸਾਰ ਜਿਹੀ ਹੈਗਾ ਸੰਸਾਰ ਤੋਂ ਉਲਟ ਹੋਇਆ ਹੋਇਆ ਇਹ ਜਿਹੜਾ ਮਨੁੱਖ ਉਹ ਧੰਨ ਨਾ ਗਿਆਨ ਉਹ ਹੀ ਨੋਬ ਬਈ ਬਹੁਤ ਬਾਂਦੀ ਜਾਣ ਜਾਜ ਤੋਂ ਅਕਮ ਤੋਂ ਬਾਂਦੀ ਜਾਣ ਉਹਦੇ ਦਰੇੜ ਉਹ ਕੋਈ ਕਹਾਸਾ ਗਾਦੀ ਜੋ ਕਰਦਾ ਬਰੇਦ ਅਪਕਾਰ ਠੀਕ ਹੈ ਜਿੱਤ ਸਦਾ ਸਦਾ ਸੁਖ ਹੋਏ ਵਸ ਇਹਦੇ ਨਾਲ ਸਦਾ ਹੀ ਸਦਾ ਸੁਖਾ ਜੇ ਤੁਸੀਂ ਕਿਲੇ ਦੇ ਵੰਗਾਲ ਦੇ ਬਿਚਾਲ ਜਨਰੇਟਰ ਬਰੈਲ ਦੇ ਅੰਦਰ ਉਹ ਸੁਖੀਆਂ ਸੁਖੀਆਂ ਕੋਈ ਖਤਰਾ ਨਹੀਂ ਇੱਥੇ ਠੀਕ ਹੈ ਜੀ ਟੋਟਾ ਮੂਲਣਾ ਆਵੇ ਹੀ ਲਾਹਾ ਸਦੀ ਹੋਈ ਕਿਸੇ ਜੀ ਦੀ ਲਾਹਾ ਹਰ ਬਲ ਪੱਖੋ ਲਾਹੇ ਹੁੜੇ ਟੋਟਾ ਹੁੜੇ ਨਹੀਂ ਕਿਸੇ ਜੀ ਦਾ ਕਭੀ ਆਉਣੀ ਠੀਕ ਹੈ ਜੀ ਖਾਦ ਹੈ ਖਰਚੀ ਹੈ ਟੋਟਣਾ ਆਵੇ ਹੀ ਸਦਾ ਸਦਾ ਉਹ ਦੇ ਇੱਜ਼ਤ ਜੇ ਤੁਸੀਂ ਵਰਜੀ ਜਿੱਦਾਂ ਇਹ ਤਾਂ ਬੁੱਢੀ ਜਿਹਾ ਲੋਕਾਂ ਨੂੰ ਢਾਲਾਂ ਪਰ ਪਰ ਵਰਤਾ ਦਿਓ ਕਿਵੇਂ ਵਰਤਾ ਦਿਓ ਖਿਲਾ ਦਿਓ ਜਿੱਦਾਂ ਵਰਜੀ ਤੋਂ ਤੇ ਜੋਰ ਲਾ ਇਹਨੂੰ ਪਬਲਿਕ ਦੇ ਵਿੱਚ ਦੱਸ ਦਿਓ ਇਹ ਘਟਦਾ ਨਹੀਂ ਹੈ ਟੋਟਾ ਨਹੀਂ ਹੁੰਦਾ ਇਹਦਾ ਇੱਕ ਥੈਲੀ ਜਾਈ ਝੋੜੀ ਜੀ ਤੇ ਟੀਆ ਖਾਲੀ ਨਹੀਂ ਹੁੰਦੀ ਇਹ ਜੇ ਜਗੋਂ ਵਧੀ ਜਾਂਦਾ ਜਿੰਨਾਂ ਲਖੂਏ ਲੋਕ ਨੂੰ ਗੰਢੋਗੇ ਜਿੰਨਾਂ ਨੂੰ ਬੱਦਰ ਵੇ ਲੋਕਾਂ ਨੂੰ ਦਸੋਗੇ ਉਹਨੂੰ ਹੀ ਵੜਨੇ ਦੇ ਸਗਾਲਦੀ ਹੈ ਜਿੰਨਾ ਖੜਾ ਦੇਣਾ ਉਹਨੂੰ ਬੀਜਿਆ ਜਾਣਾ ਹੁਣਾ ਹੋਰ ਕਿਉਣ ਉਹ ਜਿਹਨਾਂ ਨੇ ਸੁਣਨੀ ਹੈ ਗੱਲ ਉਹਨਾਂ ਨੇ ਸੱਤ ਕਰਕੇ ਉਹਨੂੰ ਵੀ ਗਾਲ ਗਾਲ ਲੱਗ ਜੀ ਨਹੀਂ ਉਹਨਾਂ ਨੇ ਬੋਲਣ ਲੱਗ ਜਾਣ ਠੀਕ ਹੈ ਸਾਰੀ ਦੁਨੀਆ ਵਿੱਚ ਫੈਲ ਜਾ ਇਹ ਇੱਕ ਟੋਕਰੀ ਉਹਦਾ ਸਦਾ ਸਦਾ ਜੋੜ ਚੱਲਦਾ ਠੀਕ ਹੈ ਸਦਾ ਸਦਾ ਉਹ ਦੇ ਦੀ ਸੋਹਣੀ ਹੋਦੀ ਉਹ ਤੇ ਉਸੇ ਵੇਲੇ ਇਹਦੀ ਕੰਨਾ ਵੀ ਉੜਦਾ ਆ ਰਾਮ ਕਰਦਾ ਤੇਰੂ ਘਟ ਦੇਗ ਨੂੰ ਦਸ ਗੱਲ ਗੱਲ ਤੇਰੀ ਅੰਨੀ ਮੌਜੂਦੀ ਆ ਅੰਨੀ ਮੂਹਰੇ ਵਿੱਚ ਹੀ ਬਦਲਨ ਗੁੱਲਾ ਤੋਂ ਬਾਹਰ ਜਾਂ ਤੋਂ ਮੂਹ ਤੇ ਵਿਚਰ ਪੂਰੇ ਬਦਲ ਲੰਦਾ ਹੈ 10000 ਦਾ ਵੀ ਨ ਕਰੀ ਜਾਵੇ ਜੀ ਠੀਕ ਹੈ ਜੀ ਸਹਿਸਾ ਮੂਲ ਨਾ ਹੋਵੇ ਹੀ ਕਦੇ ਨਾ ਹੋਵੇ ਘਾਤਾ ਚਿੰਤਾਉਂਦੀ ਹੈ ਕੈਸਾ ਘਾੜ ਤੇ ਘਾੜ ਤੋਂ ਹੁੰਦੀ ਹੈ ਵੇਚੀ ਤਾਂ ਤਾਹੋ ਜੇ ਕੋਈ ਗਲਤ ਹੋ ਕੋਈ ਗਲਤ ਕਹੀ ਹੋਈ ਝੂਠੀ ਸਬਦ ਹੋ ਜਵੇ ਵੇਚੀ ਹੁੰਦੀ ਹੈ ਆਹ ਆਣ ਤੇ ਵੇਚੀ ਰਿਹਾ ਜੀ ਠੀਕ ਹੈ ਜੀ ਮਾਨਕ ਗੁਰਮੁਖੀ ਪਾਈ ਹੈ ਜਾਕੋ ਨਜ਼ਰ ਕਰੇ ਮਾਨ ਕਹਿੰਦੇ ਇਹ ਗੁਰਮੁਖੀ ਜਿਹਨ ਲੋਗਾਂ ਨੂੰ ਗੁਰਮੁਖੀ ਹੈ ਗੁਰਮੁਖੀ ਬੁੱਧੀ ਆ ਉਹ ਰੂਪ प्राप्त ਹੁੰਦਾ ਪਰ ਗੁਰਬਾਣ ਪ੍ਰਾਪਤ ਹੋਇਆ ਤਾਂ ਸਾਰਿਆਂ ਨੂੰ ਪ੍ਰਾਪਤ ਹੁੰਦਾ ਬਦਲਣਾ ਪੈਂਦਾ ਵਿਦਵਾਨ ਤੋਂ ਗੁਰਮੁਖੀ ਬਦਲਣਾ ਪੈਂਦਾ ਵਿਦਵਾਨ ਤੋਂ ਰੂਹੀ ਮਿਲਦਾ ਵਿਦਵਾਨ ਜਿਹੜੇ ਨੇ ਨੇ ਇਦਵਾਨ ਗੁਰੂ ਗਿਆਨ ਦਾ ਰਖਾ ਹੁੰਦਾ ਹੈ ਕਾਰਨ ਦਾ। ਇਦਵਾਨ ਕੁਰਬਾਨੀ ਦੁਪਰਦੇ ਗੁਰਬ ਗੁਰਬਾਨੀ ਗੁਰੂ ਬੋਲੀ ਤੇ ਕੁਰਬਾਨੀ ਤੋਂ ਕਰਦੇ ਨੇ ਆਪਣੀ ਬੋਲੀ ਬਦਲਦੇ ਨੇ ਉਹ। ਉਹ ਆਪਣੀ ਬੋਲੀ ਨੂੰ ਕੁਰਬਾਨੀ ਗੁਰਮਤ ਅਨੁਸਾਰ ਢਾਲ ਲੈਦੇ ਨੇ ਬੋਲਣ ਦਾ ਤਿਕਾ ਉਹ ਨਾ ਬਦਲ ਜਾਂਦਾ। ਗੁਰਮ ਬਦਲ ਜਾਂਦੇ। ਤੇ ਆ ਬੜੀ ਦਾ ਨਹੀਂ ਹੁੰਦੇ। ਉਹ ਕਹਿੰਦੇ ਗਿਆਨ ਸਾਡਾ ਨਹੀਂ ਹੈ। ਅਜ਼ੀਜ਼ ਅਦਾਸ ਹਰ ਠੀਕ ਹੈ ਜੀ ਦਾਦੂ ਵਾਲ ਕਰਨੀ ਚੀਜ਼ ਫੜਾਤੀ ਵੀ ਆ ਵੱਢਦੇ ਵੱਢਦੇ ਸਤੂ ਤਾਂ ਵੱਢਦੇ ਤੂੰ ਦੇਤੀ ਮਾਲਕ ਦੀ ਚੀਜ਼ ਹੈ ਅਸੀਂ ਤਾਂ ਬਲਾਏ ਬੋਲਦੇ ਆ ਇਸ ਵਿਦਵਾਨ ਦੇ ਕੋਲੇ ਗੱਲ ਨਹੀਂ ਹੋਊਗੀ ਠੀਕ ਹੈ ਜੀ ਪੌੜੀ ਆਪੇ ਸਭ ਘਟ ਅੰਦਰੇ ਆਪੇ ਆਪੇ ਸਭ ਕੰ ਕਰਦੇ ਆਪੇ ਬਾਹਰ ਬਾਹਰ ਵੀ ਹੈ ਬਾਹਰ ਵੀ ਦੇਖ ਲੈ ਸਭ ਘੰਡੇ ਦੇ ਉੱਧਰ ਵੀ ਹੈ ਸਾਵੀ ਵੀ ਤਲ ਕਰਦੇ ਉੱਤਰ ਵਾਰਿ ਜਾਣੂ ਇੱਕੋ ਸਵਾਈ ਆਪੇ ਗੁੱਤ ਵਰਤਦਾ ਜਿਹੜਾ ਹੰਦਦਾ ਹੈ ਚੁੱਪ ਕਰ ਜਿੰਦੇ ਗੁੱਤ ਵਰਤਦਾ ਤੇ ਬੋਲਦਾ ਜ਼ਹਿਰ ਹੋ ਜਾਂਦਾ ਆਪੇ ਜ਼ਹਿਰ ਇਹ ਬਾਹਰ ਤੋਂ ਕੀ ਭਾਅ ਬਣਦਾ ਬਾਕੀ ਨੂੰ ਦੇਖਣਾ ਜਿਹੜਾ ਆਪਾਂ ਲੋਕ ਲੋਕਾਂ ਨੂੰ ਸੁਧਲਾ ਉਹਦੇ ਗਾਰਤਾਲਾਫ ਕਰਦੇ ਬਾਹਰੇ ਹੈ ਅੱਛਾ ਠੀਕ ਹੈ ਜੀ ਜਿਹੜਾ ਪਬਲਿਕ ਨਾਲ ਗੱਲ ਕਰ ਅਜੰ ਦੇ ਬਾਹਰ ਹੈ ਫਿਰ ਠੀਕ ਹੈ ਜੀ ਉਹਨੂੰ ਜ਼ਾਹਰ ਕਿਹਾ ਹੋਇਆ ਫਿਰ ਉਹ ਜ਼ਾਹਰ ਹੈ ਬਾਹਰ ਹੈ ਇਹ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉੱਥੇ ਵੇਦ ਪੁਰਾਣਾਂ ਦਾ ਥਾਸਤ ਆਪੇ ਹਰ ਨਰ ਹਰ ਛੱਤੀ ਜੁਗ ਜਦ ਅਚਪ ਕਰਕੇ ਬੈਠਾ ਰਿਹਾ ਗੁਬਾਰ ਕਰਕੇ ਸੀ ਵੇਦ ਤਾਂ ਪਿਛੋਲੇ ਜਿਵੇਂ ਵੇਦ ਹੈ ਵਿਚਾਰ ਕਰਦਾ ਉੱਥੇ ਸੁਨਾਹਰ ਅੱਛਾ ਯੋ ਕਰਕੇ ਉੱਤੇ ਵਿਚਾਰ ਤਾਂ ਚੱਲਦੀ ਹੈ ਗਾ ਦੇ ਗਾਹਾਂ ਦੇ ਗਾਹਾਂ ਜਾਂ ਕੋਈ ਪਰਦਾ ਲੋਕੇ ਪੜਾਉਂਦਾ ਲੋਕੇ ਦੇਹ ਲੋਕੋ ਦੇਹਰੇ ਲੋਕੋ ਕੁਟੀਕ ਦੁਦੁਹਾਰੇ ਸਭ ਜੋਤ ਹੈ ਜਾਤ ਲਈ ਹੈ ਅੱਛਾ 36 ਤੋਂ ਕੀਪਾ ਬਣਦਾ ਜੀ ਇਹ ਯੁੱਗ ਬਾਪ ਤੋਂ ਪਰਮੇਸ਼ਰ ਦੇ ਪਰਥਾਈ ਆ ਸਾਰੇ ਜੀਵਾਂ ਦੇ ਪਰਥਾਈ ਆ ਰਹੀਏ ਗੱਲ ਸਾਰੇ ਜੀਵਾਂ ਨੂੰ ਪਰਦਾ ਸਾਰੇ ਜੀਵ ਰਲ ਕੇ ਪਰਮੇਸ਼ਰੇ ਐ ਹੈ ਜੀ ਅਰੇ ਜਰ ਨਾ ਨਾ ਹੈ ਅੱਛਾ ਮਰਹਰ ਤੋਂ ਕੀ ਭਾਵ ਹੈ ਜੀ ਜੀਵ ਬਣਦਾ ਜਾਦਾ ਹੈ ਅੱਛਾ ਮਿਰਚ ਰੂਪ ਨਹੀਂ ਨਾ ਹੈ बोल रा दिया थे चुप पाया है सुन थोड़ी दोयल दे कि ये युग 36 गुबार कर वरतिया सुन नाहर उठया वेद पुराण ना शास्त्र आपे हर हर लनारसी ई बात बनसी पर वेद पुराण से पर शास्त्र कुछ ही सी तो कोई देवरासी लोग कोई भसीर सी लोग कोई पासीर की इच्छा सी ਕਸਰੀ ਜਨੀ ਇੱਛਾ ਕਾਦੀ ਹੈ ਪੇਟ ਪੌਦੇ ਦੀ ਸੀ ਬਨਸਪਤੀ ਦੀ ਸੀ ਕੁਛ ਨਹੀਂ ਸੀ ਪਾਣੀ ਵੀ ਨਹੀਂ ਸੀ ਠੀਕ ਹੈ ਜੀ ਬੈਠਾ ਤਾੜੀ ਲਾਏ ਆਪ ਸਬ ਦੂਹੀ ਬਾਹਰ ਤਾੜੀ ਜਣੀ ਲਾਈ ਹੋਈ ਐ ਸੁੱਤਾ ਨਹੀਂ ਬਿਆਹ ਜੀ ਸੰਤਾਂ ਦੀ ਹੈ ਢਾੜ ਦਾ ਦੇਹ ਦਾ ਵਿਚਾਰ ਹੈ सोददा मतलब है बोध करके नहीं इच्छा को अंदर प्रकट अच्छा जी चित्त कर के जी अंदर तवस्थ विच भी सोदी की है ये सोदीया तो आधी है बन अलंग कर रहा है बोल चुप है बर सुता कर के सुता आया चित्त करके ताली आई हुई अगले द... ਅਗਲੀ ਵਜਨ ਕਦੇ ਰਚਣੀ ਹੈ ਕਦਰੇ ਚ ਨਹੀਂ ਪਲੈਨਿੰਗ ਕਰਦੇ ਕੋਈ ਪਸਾਰਾ ਕਈ ਵਾਰ ਫਸਲੇ ਉਹੀ ਤਾਲੀ ਗਈ ਹੋਈ ਹੈ ਅੱਛਾ ਹੈਗਾ ਵੀ ਇੱਕ ਮਨ ਤੇ ਹਰ ਜਿਹੜਾ ਦਰਬ ਕੋਲ ਅੱਛਾ ਜੀ ਜਿਹੜਾ ਉੱਤੇ ਸਾਹ ਲੈਂਦਾ ਉਹ ਹਰ ਹੈ ਅੱਛਾ ਜੀ ਘਰ ਜੋਤ ਤੇ ਕਹਿੰਦੇ ਧਰ ਜੋਤ ਸਰੂਪ ਧਰ ਹਰ ਇੱਕ ਨਾਰਾ ਅਸੀਂ ਬੋਲਦੇ ਨੂੰ ਵੀ ਕਹਿੰਦੇ ਆ ਨਗਰਾਂ ਨੂੰ ਵੀ ਕਹਿੰਦੇ ਆ ਆਪਦੀ ਨਾਰਾ ਹਾਂਜੀ ਉਹ ਲਿੱਦ ਇਸਤਰੀ ਲਿੱਦ ਨਾਲ ਪੁੱਲ ਜਿਹੜੂ ਨਾਰਕ ਆ ਗਿਆ ਇਸ ਨੂੰ ਪਦੀਨ ਕਹਿੰਦੇ ਉਹ ਰੰਦੀ ਹੈ ਨਹੀਂ ਹਾਂ ਜੀ ਇਤਾ ਜਿਵੇਂ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਹਰ ਜਲ ਹਰ ਨੇ ਤਲੂਪ ਵਿਸਾਰ ਲਿਆ ਆਪਣਾ ਆਪਾ ਆਪਣਾ ਸਰੂਪੇ ਵਿਸਾਰ ਲਿਆ ਨਾ ਨਾ ਰਾਲਾ ਜਾਣਦਾ ਹੈ ਆ ਬੁੱਧੀ ਨਾ ਚੇਤਰੂਪ ਜਾਣਦੀ ਹੈ ਦਾਦਾ ਹਰ तेसराम भी आंदा मेरे मन से वो अलख निरंजन नरहरजित है हां सेवों मूर्ति है नु छड़ प्रतिभा बनाई बैठा बाहर जी ये भी दसो पतित पावन नाम नरहर मंद भागिया पा� नहीं पायो ਮੰਦ ਭਾਗੀਆਂ ਨਹੀਂ ਪਾਇਓ। ਜੁਗੜਾ ਹਰ ਰੂਪ ਬਦਲ ਕਦਰਦ ਨਾ ਰੂਪ ਬਾਬੂ ਦਾ ਕਰ ਲਵਾ ਲਿਆ ਹੋ। ਅੱਛਾ ਜੀ। ਸਾਬ। ਅੱਛਾ ਜੀ। ਜਿਹੜੇ ਬੁੱਢੇ ਭਾਗਾਂ ਵਾਲੇ ਨੇ ਉਹਨਾਂ ਚੰਗਾ ਨਹੀਂ ਲੱਗਦਾ। ਭਾਗਾਂ ਵਾਲੇ ਰਹਿ ਜਾਂਦੇ ਨੇ, ਪਰ ਤੋਬਾ ਬੰਦੀ ਬਣਦੇ। ਠੀਕ ਹੈ ਜੀ। ਹਾਂ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਸਭ ਕੁਝ ਛੱਡੀ ਬੈਠਾ ਬਾਹਰ। ਅਲੱਗ ਕਰ ਤਾੜੀ ਲਾਏ ਪਰਮੇਸ਼ਰ ਦੀ ਗੱਲ ਆ ਰਹੀ ਹੈ ਫਿਰ ਸਾਰੀ ਜੋਤ ਪਰਮੇਸ਼ਰ ਦਾ ਰੂਪ ਹੈ ਪਰ ਇਸ ਇੱਕ ਇੱਕ ਇੱਕ ਇੱਕ ਕਿੱਦੇ ਵੀ ਨਹੀਂ ਪਰਮੇਸ਼ਰ ਇੱਕ ਵਸਤੂ ਦਾ ਰੂਪ ਨਹੀਂ ਹੈ ਠੀਕ ਹੈ ਜੀ ਇਹ ਗਰੁੱਪ ਹੁੰਦਾ ਠੀਕ ਹੈ ਨਾਮ ਸਮਝ ਲਓ ਇਕੱਠਵਾਚਕ ਲੋ ਕੋਈ ਹਵਾ ਨਹੀਂ ਚੱਲਦੀ ਕੋਈ ਤੂਫਾਨ ਨਹੀਂ ਉੱਠਦਾ ਪਰ ਸ੍ਰਿਸ਼ਟੀ ਦੀ ਰਚਨਾ ਤਾਂ ਨੀ ਹੋਈ ਹੈ ਜੀ ਤਾਂ ਜੀ ਹੋਊ ਜੇ ਪਾਪਰ ਫੁੱਲ ਕੇ ਅੱਛਾ ਜੇ ਜਰ ਪਾਪਰ ਫੁੱਲ ਦੀ ਰਚਨਾ ਹੋਈ ਦੀ ਸਕਦੀ ਨਹੀਂ ਪਰ ਜਿਹੜੇ ਆਪਾਂ ਹੁਣ ਜੇ ਕੱਲ ਨੂੰ ਕਈ ਵਾਰ ਫਸਰਿਓ ਪਸਾਰ ਜੇ ਇੱਥੇ ਇਹ ਖੇਡ ਰੁਕੇਗੀ ਤਾਂ ਆਪਾਂ ਤਾਂ ਫਿਰ ਵੀ ਭਵ ਸਾਗਰ 'ਚ ਹੀ ਰਹਾਂਗੇ ਜਿਹੜੀ ਅਵਸਥਾ ਚ ਨੇ ਉਹ ਫਰਿੱਜ ਚ ਰੱਖ ਨੇ ਪਤਾ ਹੀ ਲੱਗਣ ਸੁਤੇ ਪਿਆ ਨੂੰ ਲੋਬੀਆ ਦੇ ਡੇਗੋ ਨੋਬੀਆ ਦੇ ਇੱਕ ਰਾਤ ਤੋਂ ਦੋ ਘੰਟੇ ਸੁਤੇ ਬੈਠੂ ਕੀ ਪਤਾ ਉਹਦਾ ਕਰਨਾ ਲੱਗ ਕੌਣ ਐ ਜਾਗਰਤ ਅਵਸਥਾ ਵਾਲਿਆਂ ਦੀ ਗੱਲ ਈਦੇ ਸੇਤੀ ਬੜੀ ਗਾਂ ਤਾੜੀ ਲਾ ਕੇ ਬੈਠਾ ਵੀ ਕੌਣ ਬਗਾਵਤ ਕਰਦਾ ਕੌਣ ਬੋਲਦਾ ਧਿਆਨ ਸਾਰੇ ਇਹਨਾਂ ਦੇ ਅੰਦਰ ਖੋਟ ਪੈਦਾ ਹੋ ਰਹੀ ਹੈ ਹੋਈ ਹੈ ਇਹ ਤੋਂ ਖਤਰਿਆ ਹੈ ਪਿਆ ਗੁਰੂ ਪਾਪਾ ਦੇ ਖਿਲਾਫ ਬੋਲੂਗਾ ਉਹ ਲੋਟਾਂਗਲ ਪਾੜੀ ਹਾਕਮ ਨੇ ਲਾਈ ਹੋਈ ਹੈ ਲਾਈ ਹੋਈ ਹੈ ਹਾਕਮ ਨੇ ਕਿਹਦੇ ਲਾਈ ਧਾਰਾ ਕਿਹਦੇ ਇਕੱਠਾ ਇੱਕ ਹਜ਼ਾਰ ਲੱਖ ਕਰੋੜਾਂ ਦੀ ਸਾਰੇ ਜਿਹੜੀ ਉਹ ਦਾੜੀ ਪਾਸੇ ਤੇ ਲਾਇਆ ਦੇ ਤੌਰ ਤੇ ਹਾਕਮ ਹਾਕਮ ਜਦ ਕਹੇਗਾ ਜਦ ਹਾਕਮ ਸ਼ੁਰੂ ਹੋ ਜਾਊਗਾ ਅੱਛਾ ਜੀ ਉਸ ਤੋਂ ਪਹਿਲਾਂ ਸ਼ੋਦਾ ਅਕਬਰ ਕਹਿ ਠੀਕ ਹੈ ਜੀ ਆਪਣੀ ਮਿਤ ਜਾਣਦਾ ਆਪੇ ਹੀ ਗੋਹਰ ਆਪਣੀ ਮਿਤ ਜਾਣਦਾ ਆਪਣੇ ਦਿਲ ਦੀ ਜਿਹੜੀ ਆਪੇ ਚਲਦਾ ਆਪੇ ਹੀ ਗੋਹਰ ਹੈ ਗਹਰ ਵੱਡਾ ਹੈ ਗਹਿਰ ਉਹਦਾ ਥਲੇ ਨੂੰ ਗਹਰ ਉਹਦਾ ਬਹੁਤ ਦੂਰ ਤੱਕ ਹੈ ਗਹਿਰਾਈ ਵੱਲ ਜਦੀ ਹੈ ਅੱਪਰੂ ਜਾਵੇ ਦੂਰ ਗਹਰ ਬਹੁਤ ਬਹੁਤ ਠੀਕ ਹੈ ਜੀ ਹਾਂ ਜੀ ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ